ਰੋਕੁ ਮਨ ਸਾਥ ਕਾਂਜਿ ਹਾਸੀ ਕਰਨ ਕਥਨੰ ਸੁਈਆ ਖਰੀ ਬ੍ਰਿਜਨਾਥ ਕਹਿਓ ਤ੍ਰੀਸੋ ਮੋਇ ਭੋਜਨ ਗੋਪਨ ਧਾਮ ਕਰਿਓ ਸੁਨ ਸੁੰਦਰ ਤਾ ਦਿਨ ਤੇ ਹਮਰੋ ਵਿਛਿਆ ਤਦ ਕੋ ਹੁਨ ਨਾਮ ਪਰਿਓ ਜਬ ਸਿੰਧ ਜਰਾ ਸਾਥ ਚੜਿਓ ਭਜ ਗਏ ਤਬ ਨਾਇਕ ਨ ਧੀਰ ਧਰਿਓ ਤੇ ਤੇ ਤੁਮਰੀ ਮਤ ਕਹੋ ਅਵਕਾ ਕਹੀਐ ਹਮਸਉ ਕਹਿ ਆਨ ਬਰਿਓ ਰਾਜ ਸਮਾਜ ਨਹੀਂ ਸੁਮਸੰਦਰ ਨਾ ਤਨ ਕਾਉ ਤੇ ਮਾਗ ਲਇਓ ਹੈ ਸੂਰ ਨਹੀਂ ਜਿਨ ਤਿਆ ਕੈ ਆਪਣੋ ਦੇਸ ਦਰਮੋ ਬਾਸ ਖਯੋ ਹੈ ਚੋਰ ਪਰਿਓ ਮਮ ਕੋ ਫੁਰਨਾਮ ਸੋ ਯਾਹੀ ਤੇ ਕ੍ਰੋਧਤ ਪ੍ਰਾਤ ਪਯੋ ਹੈ ਕਾਹੀ ਤੇ ਮੋ ਤਜ ਕੈ ਬਰਿਆਨ ਤੇਰੋ ਕਛੂ ਅਬ ਨਾ ਗਯੋ ਹੈ ਰੁਕਮਨੀ ਬਾਸ ਕੀ ਸੋ ਸੋਈਆ ਚਿੰਤ ਕਰੀ ਹਮ ਸੋ ਮਨ ਮੈਂ ਨਾ ਥੀ ਜਾਣਤ ਸਿਆਮ ਕਰ ਹੈ ਬਰਮੋ ਤਜ ਕਹਿ ਤੋ ਆ ਬਚਨਾ ਏ ਭਾਤ ਕੇ ਉਚਰ ਹੈ ਹਮਰੋ ਮਰ ਬੋਈ ਬਨਿਓ ਏ ਠਾਂ ਜੀ ਹੈ ਨਾ ਆਵਾਸ ਅਬੈ ਮਰ ਹੈ ਮਰ ਜੋ ਨਾ ਜਾਤ ਪੜੇ ਸਦਨੀ ਆਪਨ ਪਤ ਸੋ ਹਟ ਕੈ ਜਰ ਹੈ ਸਵਈਆ ਰੀ ਕਾਂਥ ਸੋ ਹੋਏ ਮਰ ਮੈ ਮਰ ਬੋਈ ਚਿਤ ਬੀਜ ਵਿਚਾਰਿਓ ਮੋ ਸੰਗ ਕਿਉ ਬ੍ਰਿਧਨਾਥ ਬੈ ਕਬ ਸ਼ਾਮ ਕਹੈ ਬੈਨ ਉਜਾਰਿਓ क्रोध सो खायत वार धरा पर चूम गिरी नहीं नेक संभार्यो यूं उपमा उपजी जी मैं जन टूट गयो रुख बियार को मार्यो जोरा अंक लियो पर कानते दूर करण को क्रोध सा धारण कर रुक्मणी जानदपाती कियो प्रबोध सोइया तेरे ही धर्म ते मैं सुन सुंदर केशन ते के कै कंस तेरे ही धर्म ते सिंध जराऊ को सैन सबै चनमाय संघार्यो ਤੇਰੇ ਹੀ ਧਰਮ ਜਿਤੇਉ ਮਗਵਾ ਅਰ ਤੇਰੇ ਹੀ ਧਰਮ ਪੂ ਮਾ ਸੁਰ ਮਾਰਿਓ ਤੋ ਸੋ ਕੀਓ ਭਾਸ ਵੈ ਮੋਇ ਤੈ ਆਪਣੇ ਜੀ ਸਾਥ ਵਿਚਾਰਿਓ ਰੁਕਮਨੀ ਬਾਚ ਸਵਈਆ ਜੋਪੀ ਕੀ ਤ੍ਰਿਆ ਬਾਸੁਨੀ ਦੁਖ ਕੀ ਤਬ ਵੈ ਬਿਸਰਾਈ ਭੂਲ ਪਰੀ ਪ੍ਰਭ ਕੀ ਜੈ ਛਿਮਾ ਮੋਇ ਨਾਰ ਨਿਵਾਇ ਕੈ ਨਾਰ ਸੁਨਾਈ ਔਰ ਕਰੀ ਉਪਮਾ ਪ੍ਰਭ ਕੀ ਜੋ ਕਬਤਨ ਮੈਂ ਵਰਨੀ ਨਹੀਂ ਜਾਏ ਉਤਰ ਦੇਤ ਪਈ ਹਸ ਕੈ ਹਰ ਮੈਂ ਉਭਾਸ ਕੀ ਬਾਤ ਨਾ ਪਾਈ ਦੋਰਾ ਮਾਰ ਕਥਾ ਰੁਕਮਨੀ ਕੀ ਸਿਆਮ ਕਹੀ ਚਿਤ ਲਾਏ ਆਗੇ ਕਥਾ ਸੁ ਹੋਏਗੀ ਸੁਨਿਯੋ ਪ੍ਰੇਮ ਵਡਾਏ ਕਬਿਓ ਬਾਸਵਈਆ ਸ੍ਰੀ ਜਗਵੀਰ ਕੀ ਜੈ ਤੀ ਤ੍ਰਿਆ ਸਭ ਕੋ ਦਸੂ ਦਸ ਪੁੱਤਰ ਦिए और एक है ਏਕ दई दोहता तिन के सुखलास बढाए हीए सब कान की मूर्त श्याम पना सब कंठ पटंबर पीत लिए करणा निद कौतुक देखन को यह भूपर आए चित्र कीए इद श्री दशम स्कंधे पुराणे विचित्र नाटक कृष्णा रुक्मणी उपहास